ਸਤ ਸਤ ਸਤ ਪਰਮ ਸਵਾਮੀ ਗੁਰ ਪ੍ਰਸਾਦ ਕਿਨੇ ਵਿਗਿਆਨ ਨੂੰ ਸਤ ਸਤ ਸਤ ਸਕਰਾਉ ਸਤ ਪਰਮ ਸਵਾਦੀਏ ਹਮੇਸ਼ਾ ਰਹਿਣ ਵਾਲਾ ਸਤ ਸਰੂਪ ਹੈ ਔਰ ਸਤ ਸਤ ਸਤ ਨਵਰ ਜੋਰ ਦੇ ਜਿੱਕੇ ਹੈ ਕਿੰਨਾ ਕਾਲਾ ਜਨੀ ਉਮਰ ਦਾ ਨਾ ਕਾਲਾਂ ਦੇ ਰਹਿਣਾ ਸੱਤ ਸੱਤ ਸੱਤ ਕਾਲ ਮਾਇਆ ਦੇ ਵਿੱਚ ਮਾਇਆ ਦੇ ਜਬੜ ਵਰਨਾ ਮਾਇਆ ਜਿਹੜਾ ਸੱਤ ਚੰਨ ਕਾਲਾਂ ਤੋਂ ਪਰੇ ਆ ਮਹਾਰਾਜ ਜੀ ਸਭੀ ਗੁਰ ਪ੍ਰਸਾਦ ਕਿਹਨੇ ਬਖਿਆ ਜੀ ਚਾਹ ਤੇ ਕਿਰਪਾ ਕਿਸੇ ਨੇ ਉਹਦਾ ਬਿਸ਼ਾਪ ਬਖਸ਼ਾਮ ਕਰਦਾ ਕਿਸੇ ਨੇ ਉਹਦਾ ਬਿਸ਼ਾ ਚੁੜ੍ਹਿਆ ਕਿਸੇ ਨੇ ਉਹਦਾ ਬਿਸ਼ਾ ਟੱਚ ਕੀਤਾ ਜੋ ਸੋਨ ਪਈਆਂ ਸੱਤ ਸੱਤ ਫੱਟਾ ਉਹ ਕੀ ਹੈ ਉਹਦਾ ਗਿਆਨ ਕਰਾਉਣ ਦਾ ਵਿਸ਼ਾ ਕਿਸੇ ਵਿਰਲੇ ਨੇ ਚੁੱਕ ਕੀਤਾ ਗੁਰਪ੍ਰਸਾਦ ਕਹਿੰਦਾ ਵਿਰਲੇ ਜੀ ਕੋਈ ਪਖਾ ਕੀਤਾ ਇਸ ਗੱਲ ਦਾ ਇਹਦਾ ਵਿਸ਼ਾ ਕਿਸੇ ਨੇ ਮਿਲਦੇ ਨਾ ਸਮਝਾਇਆ ਇਹ ਜਿਨ੍ਹਾਂ ਨੇ ਵਿਸ਼ਾ ਸੁਝਾਇਆ ਚੁੱਕੀ ਤਾਂ ਗੁਰਬਾਣੀ ਇਹ ਵਿਰਲੇ ਆ ਜਿਹਨਾਂ ਸਾਰੇ ਉਹ ਜਿਹੜੇ ਇਹਦੀ ਅਰਥ ਕਰਦੇ ਉਹ ਵੀ ਬਿਰਲੇ ਚ ਹੋ ਰਹਣਗੇ ਜਿਹੜੇ ਹੁਣ ਇਹਨੂੰ ਸਮਝੋਗੇ ਸਮਝਣਗੇ ਨਾ ਸਮਝ ਲੈਣਗੇ ਉਹ ਵੀ ਬਿਰਲੇ ਹੋਣਗੇ ਅਗਲੀ ਬੰਦੇ ਆ ਕੋਟ ਮਦੇ ਕਿਨੇ ਬਿਰਲੇ ਸੱਚ ਸੱਚ ਸੱਚ ਸਭ ਕੀਨਾ ਜਿਹੜਾ ਕੁਛ ਵੀੰਦਾ ਕੀਤਾ ਹੋਇਆ ਇਹ ਸੱਚ ਨਹੀਂ ਕੀਤਾ ਸੱਚ ਨਹੀਂ ਕੀਤਾ ਸੱਚ ਨਹੀਂ ਕੀਤਾ ਜੇ ਸ਼ਰੀਰ ਬਣਾਇਆ ਕਿਤੇ ਤਾਂ ਉਹ ਵੀ ਸਤਿ ਸਰੂਪ ਹੈ ਵਿੱਚ ਉਹਨੇ ਸ਼ਰੀਰ ਜਿਹਾ ਚਾਹੇ ਹੋ ਉਹਨੇ ਹਉਂਦੇ ਇੱਕ ਮਾਇਆ ਦੇ ਅਸਰ ਬਾਕੇ ਆਪਣਾ ਸ਼ਰੀਰ ਜਿਹਾ ਬਣਾ ਲਿਆ ਉਹ ਵੀ ਸੱਚ ਨਹੀਂ ਕੀਤਾ ਅੱਜ ਤਾਂ ਸੱਚੇ ਜੋਤ ਤਾਂ ਸੱਚੀ ਹੋ ਹੀ ਹੋਗੀ ਜਿਹੜਾ ਬਾਹਰ ਬਣਾਇਆ ਰਚਨਾ ਉਹ ਸੱਚ ਹੈ ਆਪ ਅਰਦਾਸ ਕੀ ਅਰਦਾਸ ਸੱਚ ਦੀ ਹੈ ਹਾਂ ਇਸ ਫੈਸਲੇ ਨੇ ਫੜ ਕੇ ਸੱਚ ਸੱਚ ਨਾ ਤੂੰ ਫੜਕ ਵੀ ਇਹਦੀ ਕੋਈ ਸੱਚਾ ਦਾ ਸੱਚ ਇਹ ਕੋਈ ਵੀ ਨਹੀਂ ਸੱਚ ਇਹਦੀ ਦਾ ਸੱਚ ਪੰਜਾਬੀ ਹਿੰਦੀ ਦਾ ਪਹਿਲਾਂ ਸੱਚ ਸੱਚ ਆਇਆ ਹੋਇਆ ਸੱਚ ਔਰ ਸਾਜਵੀ ਲੱਗਦਾ ਹੈ ਸੱਚ ਸੱਚ ਜੀ ਦੀ ਉਹ ਸੱਚ ਸਾਚੀ ਮੁਕ ਸਾਚਾ ਮੁਕ ਸਾਚਾ ਸੋਏ ਇਹ ਉਰਦੂ ਵਰ ਜਿਹੜੀ ਹਿੰਦੀ ਦਾ ਜਿਹੜਾ ਮਿਚਰ ਹੈ ਨਾ ਉਹ ਜੋ ਸੱਚ ਪੈਦਾ ਹੋਇਆ ਹੈ ਆਪਣੀ ਜਿਹੜੀ ਭਾਸ਼ਾ ਹੈ ਇੱਧਰ ਉਰਦੂ ਸੀ ਪਰ ਪਾਸੇ ਅੱਧਰ ਹਿੰਦੀ ਹੈ ਕਿਉਂਕਿ ਜਿਚਾੜੇ ਪਾਸੇ ਤੋਂ ਹੁੰਦੇ ਲਫ਼ਜ਼ ਉਰਦੂ ਦੇ ਜ਼ਿਆਦਾ ਨੇ ਕੁਝ ਲਫ਼ਜ਼ ਹਿੰਦੀ ਨਾਲ ਜ਼ਿਆਦਾ ਨੇ फला फला फला तेरा रूप अति सुंदर अपार अरुण फला फला फला तेरा रूप अत सुंदर अपार अरुण तेरा रूप फला है तेरा रूप फला है जो तेरा दर्शन भी फला है रूप पराते दर्शन से भलाई है ये रूप परा और रूप ने ही भला कर दे सिर्फ दर्शन परा रूप रे दर्शन होना तो रूप है भला दर्शन से दर्शन भला कर जो भला साडा हुण दर्शन ਨਾਲ ਸਾਰਾ ਹੀ ਭਲਾ ਹੋ ਜਾਂਦਾ ਹੈ ਬਾਕੀ ਕੁਝ ਗੁੱਡਣ ਦੀ ਲੋੜ ਨਹੀਂ ਅਤ ਸੁੰਦਰ ਅਪਾਰ ਉਹ ਮੰਗਲ ਮੰਗਲ ਦੀ ਕੋਈ ਲੋੜ ਸਰ ਸ਼ੰਤੀ ਦੀ ਲੋੜ। ਪਲਾ ਪਲਾ ਤੇ ਪਲਾ ਤੇਰਾ ਰੂਪ ਅਤ ਸੁੰਦਰ ਅਪਾਰ ਉਹ ਸੁਤਰ ਅਪਾਰ ਅਰੂਪ। ਹਬਦ ਸ਼ਬਦ ਗੁਰੂ ਅਰੂਪ। ਰੂਪ ਤਾਂ ਹੈ ਸ਼ਬਦ ਗੁਰੂ ਹੀ ਹੈ। ਸ਼ਬਦ ਹੈ ਰੂਪ ਹੈ ਜੋ ਗਿਆਨ ਹੈ ਉਹ ਰੰਗ ਦਾ। ਕਿਆ ਨੂੰ ਰਹਿਗਰ ਨੇ ਸ਼ਬਦ ਨੂੰ ਰੂਪ ਕਰਦੇ ਉਹਦੇ ਹੀ ਵੀ ਸ਼ਬਦੇ ਆ ਰੂਪੇ ਹੁੰਦੀ ਇਹਦੇ ਹੀ ਜੇ ਕਿਹ ਨਿਰਾਗਰਨਾ ਸ਼ਬਦ ਹੈ ਉਹ ਰੂਪਾ ਕੋ ਨਿਰਾਗਰਤੀ ਲੋ ਇਛਾ ਹੋਇਆ ਦਾ ਰੂਪ ਹੈ ਰੰਗ ਹੈ ਉਹ ਰੰਗ ਜੋ ਹੈ ਉਹਦੇ ਅੰਦਰ ਉਹ ਉਹਦਾ ਸ਼ਬਦ ਹੈ ਉਹ ਉਹਦਾ ਰੂਪ ਹੈ ਜੋ ਲਹਿਰ ਉਠੀ ਹੈ ਉਹਦਾ ਰੂਪ ਹੈ ਉਹਦਾ ਲਹਿਰਾਂ ਚੈ ਉਹ ਲਹਿਰ ਉੱਠੀ ਜਰੋ ਜੇ ਤਾਂ ਉੱਠਿਆ ਪਰਮार्थ ਦੀ ਲਹਿਰ ਵਿੱਚ ਪਰਮार्थ ਦੀ ਫੇਰ ਤੌਰੂਬਾ ਸੁਖदाई ਹਰ ਕੋ ਨਾਮ ਸਦਾ ਸੁਖदाई ਸੁਖदाई ਫੇਰ ਤੋਂ ਸੁਖदाई ਹੈ ਕਿ ਪਰਮਾਰਥਾ ਪਰਮਾਰਥਾ ਦੀ ਸੁਖदाई ਹੋਗੀ ਜੋ ਜੋ ਸਤਪਨ ਸੁਖ ਮਿਲੂਗਾ ਤਾਂ ਹੀ ਪਰਮਾਰਥ ਹੈ ਜੇ ਉਹ ਸਵਾਸਤੀ ਹੋਊ ਫਿਰ ਆਪਣੇ ਬਾਅਦ ਤੇ ਦਾ ਸੁਖदाई ਅਸੀਂ ਮੰਨਾਂਗੇ ਸਾਰੀਆਂ ਬਾਤਾਂ ਤੇ ਸੁਖदाई ਹੋਵੇ ਗੱਲ ਜ਼ਰੂਰੀ ਦੀ ਕੋਨਾ ਬਾਤ ਸੁਖदाई ਹੋ ਸਕਦੀ ਹੈ ਜਿਹੜੇ ਸਾਡੇ ਨਾਲ ਅਟੈਚ ਹੋਣ ਬੱਜੇ ਜੈਸੀ ਸਾਡੀ ਦੁਨੀਆ ਦੀ ਸੁਖਦਾਈ ਜੁਨੇ ਵਾਸਤੇ ਸੁਖਦਾਈ ਨਹੀਂ है ਇੱਛਾ ਸਾਡੀ ਚਾਹ ਆਪਣੇ ਵਾਸਤੇ ਆ ਸਾਡੇ ਕਿਸੇ ਲਗਾਓ ਵਾਲਿਆਂ ਵਾਸਤੇ ਠੀਕ ਹੋ ਸਕਦੀ ਹੈ ਸੁਖਦਾਈ ਹੋ ਸਕਦੀ ਸਾਡੀ ਇੱਛਾ ਕੋ ਪੂਰੀ ਹੋ ਜਵੇ ਦੁਨੀਆ ਬਈ ਇੱਛਾ ਦੀ ਨੂੰ ਪਕਾਦੇ ਸਾਡੀ ਇੱਛਾ ਤੋਂ ਦੂਰ ਹੀ ਹੁੰਦੀ ਹੈ ਜਿਹੜੀ ਸਾਰਥਰੀ ਇੱਛਾ ਹੈ ਉਹ ਦੁਇ ਦਾ ਲੱਗਦਾ ਤਾਂ ਹੀ ਹੈ ਦੂਜਾ ਦਾ ਟੱਕੇ ਲੱਗਦਾ ਤਾਂ ਉਹ ਮੂਰੇ ਹੀ ਸਾਂ ਪਰ ਦੂਜਿਆਂ ਨੂੰ ਵੀ ਇਹ ਲੱਗਦਾ ਕਿ ਸ਼ਾਇਦ ਇਹ ਅਦਾਸ ਕਵਿਤੇ ਆਖਣ ਪਾੜ ਕਰਾਏ ਦੇ ਆ ਸੁੱਖ ਦੇ 因 ਨੂੰ ਜੇ ਤੇ ਡਾਜਾਲ ਹੋ ਜਾਂਦੀ ਹੈ ਉਹ ਕਹਣੇ ਵਾਲੇ ਕਹਾਂ ਆ ਉਹ ਆ ਸੁੱਖਿਆ ਦੀ ਮੇਰਾ ਆ ਹੋ ਗਿਆ ਉਹ ਕਿਹਾ ਕਿ ਕੱਚਾ ਕੜਾ ਰਹਿ ਉਸ ਨੇ ਉਹ ਕਹਿੰਦਾ ਗਿਆ ਉਹਨਾਂ ਦੇ ਏਜੰਟ ਗਾਗਮਨ ਵੇਰੇ ਨੇ ਨਾ ਪ੍ਰਚਾਰ ਕਰਕੇ ਜਿਹੜੇ ਆਦਮੇ ਕੋਈ ਮਜਬੂਤ ਰਾਧੇ ਵਾਲੇ ਨਹੀਂ ਹੈ ਸਾਰੇ ਮਜਬੂਤ ਰਾਧੇ ਵਾਲਾ ਕੋਈ ਵੱਲ ਨਹੀਂ ਆ ਇਸ ਘਰ ਕੇ ਜਿਹੜੇ ਡੋਲਣ ਵਾਲੇ ਰਾਧਿਆਂ ਵਾਲੇ ਉਹਨਾਂ ਤੇ ਅਸਰ ਹੁੰਦਾ ਰਹਿੰਦਾ ਨਾ ਕੋਈ ਲੋਬੀ ਤਾਂ ਉਹ ਇਹਨਾਂ ਦੇ ਅਹਿਸਕਾਰ ਬਣਦੇ ਰਹਿੰਦੇ ਅਗਿਆਨੀਆ ਲੋਬੀ ਇਹ ਨਾਲਾ ਸ਼ਿਕਾਰ ਬਣਦੇ ਰਹਿੰਦੇ। ਉਹਨਾਂ ਨੂੰ ਸ਼ਿਕਾਰ ਬਣਨ ਦੇਣ। ਜਿਹਨ ਲੋਭਿਓ ਹੋਰ ਅਗਿਆਨ ਹੋ। ਅਸੰਤ ਵਿੱਚ ਅਗਿਆਨੇ ਆਦਮੀ ਲੋਕੀ ਹੁੰਦੇ ਹੀ ਐ। ਇਹ ਲੋਭੀ ਆਦਮੀ ਅਗਿਆਨੀ ਹੁੰਦਾ ਹੀ ਐ। ਆਹ। ਤਾਂ ਗੁਰੂ ਸਤਗੁਰੂ ਬਾਰੇ ਵੀ ਜ ਰੋਸਾ ਹੁੰਦਾ ਵੀ ਐ ਸਾ ਹੈ ਵੀ। ਅਗਿਆਨੇ ਰੂਹ ਸਤਗੁਰੂ ਸੱਜਣ ਨੂੰ ਗਿਆਨਮਾਨੇ ਪਛਾਣਦਾ ਹੈ ਹਰੇਕ ਨਹੀਂ ਪਛਾਣਦਾ ਰੰਗ ਮਿਲੂਗਾ ਲੈਣਾ ਨੂੰ ਗੁਰਨਾਮ ਸਿੰਘ ਨੇ ਪਛਾੜਿਆ ਦੂਜਿਆਂ ਨੂੰ ਜਦ ਪਤਾ ਲੱਗਿਆ ਯਾਰੋ ਉਸ ਵਸਤਾ ਨੂੰ ਉਸ ਵਸਤਾ ਵਾਲਾ ਹੀ ਪਛਾਣਦਾ ਠੀਕ ਹੈ ਨੂੰ ਪਤਾ ਲੱਗਦਾ ਹੁੰਦਾ ਆਉ ਉਹ ਜੀ ਕੋਈ ਪਤਾ ਲੱਗ ਜਾਂਦਾ ਹੈ ਉਹ ਵੀ ਜਿੰਨਾ ਕਿਸਮ ਗਿਆ ਉਹਨਾ ਹੱਥਾ ਲੱਗ ਜਿੰਨਾ ਬੋਲੇ ਉਹ ਗਿਆ ਉਹ ਤਾਂ ਉਹਨੂੰ ਕੋਲ ਉਹ ਆਪਣੇ ਤਖੜੀ ਨਾਲੇ ਤੋੜਨਾ ਹੁਣ ਜਿਹੜੀ ਤਖੜੀ ਸ਼ਰਾਬ ਦੀ ਹੈ ਉਹਦੇ ਦੇ ਕਿਲੋ ਦਾ ਤੋਲਦੇ ਨਹੀਂ ਕਿਲੋ ਵਾਲਿਆਂ ਕੋਲ ਨਹੀਂ ਲੜੀਆਂ ਹੀ ਨਹੀਂ ਨਾਉ ਥਿਸ ਫੇਸ ਹੈ ਕਿਲੋ ਵਾਲੀ ਉਹਦੇ ਦਾ ਥੋੜੇ ਹੀ ਤੋਲਦੇ ਨੇ ਗਰਾਂਡ ਵਿੱਚ ਨੇ ਜਦੋਂ ਯਾਰ ਤੇਰੀ ਤੱਕ ਉਹਦੇ ਤੇ ਘਰਾਂ ਵਾਸਤੇ ਔਲੇ ਨਹੀਂ ਤੁਲਦੇ ਖੁਦ ਦੇ ਆਪਣਾ ਚੱਲੋ ਹੀ ਦੌੜਨਾ ਕੋਟਲੇ ਤੁਲਣਾ ਜਿਵੇਂ ਜਿਹੇ ਕਿਸੇ ਦੀ ਹੁੰਦੀ ਹੈ ਉਹ ਹੀ ਆਉਦਾ ਭਜਾ ਉਹਨਾਂ ਜ਼ੋਰ ਦੋਸਤ ਨੂੰ ਕਿਸੇ ਹਾਂ ਭਲਾ ਭਲਾ ਭਲਾ ਤੇਰਾ ਰੋਗ ਅਤ ਸੁੰਦਰ ਅਪਾਰ ਅਨੂਪ ਅਤ ਸੁੰਦਰ ਅਪਾਰ ਰੂਪ ਪਲਾ ਪਲਾ ਪਲਾ ਤੇ ਜਿਹੜਾ ਤੇਰਾ ਰੂਪ ਹੈ ਪਲਾ ਦੇਖੋ ਅਤ ਸੁੰਦਰ ਅਪਾਰ ਅਨੂਪ ਰੂਪ ਸੁੰਦਰ ਬੂਤੀਆਂ ਬਣਾ ਦੀਏ ਉਹ ਤਾਂ ਕਹਿੰਦਾ ਅਨੂਪ ਵਾਲਾ ਅਤ ਸੁੰਦਰ ਅਪਾਰ ਅਨੂਪ ਅਨੂਪ ਵਾਲੀ ਗੱਲ ਛੱਡ ਤੀ ਤੇਰੇ ਉਪਰ ਇਹਦਾ ਚ ਦੂਸਰਾ ਨਹੀਂ ਲੱਗਦਾ ਉਹਨਾਂ ਇੱਦਾਂ ਕ੍ਰਿਸ਼ਣ ਦੀਆਂ ਫੋਟੋਆਂ ਬਣਾਉਂਦੇ ਨੇ ਸਾਰੀਆਂ ਜਗ੍ਹੀਆਂ ਲੱਗਦੀਆਂ ਦਿਖਤੂ ਇਹਨਾਂ ਵਿੱਚ ਇੱਥੇ ਦੇਖੀਓ ਨਾ ਇਹ ਕ੍ਰਿਸ਼ਣ ਦੀਆਂ ਫੋਟੋਆਂ ਉਹ ਵਰਾਂਗੀਆਂ ਫੋਟੋਆਂ ਵੀ ਪੋਤਾਂੀਆਂ ਫੋਟੋਆਂ ਵੀ ਬਿਸ਼ਨੂ ਦੇ ਫੋਟੋਆਂ ਵੀ ਭੂਰਤਿਆਂ ਵੀ ਉਹ ਅਲੱਗ-ਅਲੱਗ ਰੂਪ ਨੇ ਉਹਨਾਂ ਦੇ ਵਿੱਚ ਕੋਈ ਇਹਦੀ ਰੂਪ ਬਣੇ ਹੋਏ ਪਰ ਉਹ ਸੁੰਦਰ ਤੇ ਸੁੰਦਰ ਬਣਾ ਰਹੇ ਨੇ ਉਹ ਤਾਂ ਰੂਪ ਨਹੀਂ ਰੂਪ ਦਾ ਉਪਮ ਹੈਗੀ ਬਰਾਬਰ ਉਹਦੇ ਨੂੰ ਚੱਗੀ ਦੁਹਣ ਸਕਦੀ ਆ ਲੋ ਆਪਾਂ ਕਹਿੰਦੇ ਆ ਕਿ ਆ ਫਲਾਨੇ ਵਰਗਾ ਐਡੀ ਫਲਾਨੇ ਵਰਗੀ ਸ਼ਕਲ ਆਦਮੀ ਆਦਮੀ ਫਿਰ ਉਹ ਰੂਪ ਤਾਂ ਨਾ ਹੋਇਆ ਚੰਦਰਮਾ ਵਰਗਾ ਮੂੰਹ ਆ ਚੰਦਰਮਾ ਬਸ ਉਹਦਾ ਦਾਇਮਤੀ ਸਕਦੇ ਵੀ ਆਇਆ ਜਾਕ ਭਾਤ ਜਿਹੜੇ ਅੱਖਾਂ ਨੂੰ ਦੇਖਣ ਵਾਲੇ ਰੂਪ ਨੇ ਅਜਿਹਾ ਖਾਣੂ ਦੇ ਖਾਣ ਵਾਲੂ ਨਹੀਂ ਹੋ ਅੱਖਰ ਦੇ ਖਾਣ ਵਾਲੇ ਨੂੰ ਬਹੁਤ ਭਵਾਂ ਦੇ ਸਕਦੇ ਆਂ ਸੀ ਜੋ ਖਾਣਾ ਅਜੀਬ ਚੀਜ਼ਾਂ ਦੇ ਦਿੰਦੇ ਆਂ ਜਦ ਉਹਨਾਂ ਦੀ ਉਪਮਾ ਅਸੀਂ ਦਿੰਦੇ ਆਂ ਅਸਲ ਜੋ ਅਪਵਿੱਤਰ ਉਪਭੋਗ ਹੁੰਦੀ ਹੈ ਇਹ ਕਿਹੜਾ ਸੁੱਤਲ ਲਭ ਦਾ ਇਹ ਅਪਵਿੱਤਰ ਲਭ ਜੀ ਇਹਨੇ ਪਰ ਸਭ ਤੋਂ ਬਵਿੱਤਾ ਮੈਂ ਜਿੰਨਾਂ ਦੀ ਤੁਹਾਨੂੰ ਸੁੰਦਰ ਰੂਪੇ ਖੜਾ ਕਰਦਾ ਰੱਖਾ ਖੜਾ ਕੰਮ ਲਾਉਂਦਾ ਖਾਣਾ ਰਖੰਦੀ ਉਹਦਾ ਵਿਚ ਹੈ ਰੂਪ ਲੱਗਦਾ ਹੈ ਉਹ ਪਵਿੱਤ ਅੱਲਾਹ ਵਾਜ਼ਾ ਖਾਣ ਵਾਲੀ ਦਾ ਰੂਪ ਜੋ ਖਾਣੀ ਪਕੜ ਚੀਜ਼ ਹੈ ਨਾ ਕਦੇ ਪਕੜ ਚੀਜ਼ ਹੈ ਜੀਵ ਦੀ ਪਕੜ ਚੀਜ਼ ਹੈ ਜੋ ਸਾਡੇ ਗਿਆਨ ਇੰਦਰੀਆਂ ਦੀ ਪਕੜ ਚੀਜ਼ ਆ ਗਈ ਉਹਦੀ ਬਸਾ ਲੱਤ ਹੈ ਕਿ ਉਹ ਸਾਰੀ ਅਪਵਿੱਤ ਹੈ ਉਹ ਪਾਸ਼ਾ ਅਪਵਿੱਤ ਹੈ ਸਾਰੀ ਉਹ ਲੱਭਦਾ ਬੱਤ ਦਿ ਸਾਰੇ ਸੰਸਾਰੀ ਬੋਲੀਆ ਸੰਸਾਰੀ ਚੀਜ਼ਾਂ ਨੇ ਉਹ ਮਾਇਆ माया ਉਹ ਮਾਇਆ ਹੁਦੀ ਉਹ ਵਿਚ ਜਿੱਤਨੇ ਵਿੱਚ ਵਿਖਿਆ ਨਾਲ ਰਿਲੇਟਡ ਗੱਲਾਂ ਚਾਹੇ ਉਹ ਸੱਚ ਵੀ ਹੈ ਉਹ ਪਵਿੱਤਰ ਨਹੀਂ ਅਪਵਿੱਤਰ ਉਹਨਾਂ ਐ ਪਵਿੱਤਰ ਕਰਤੇ ਅਰਥ ਪਰ ਬਾਣੀ ਨੂੰ ਅਸੀਂ ਪਵਿੱਤਰ ਮੰਨਦੇ ਆ ਕਿਉਂ ਸਾਨੂੰ ਉਹ ਲਾਫ ਬਸਤੇ 'ਤੇ ਮਜਬੂਰੀ ਸੀ ਸਾਡੀ ਪਰ ਜਿਹੜਾ ਤਤ ਗਿਆ ਨਾ ਉਹਦੀ ਵਜ੍ਹਾ ਨਾਲ ਉਹ ਫਤਵੀ ਫਤਰ ਹੋ ਗਿਆ ਤਾਂ ਕਰਕੇ ਛੁੜਤੇ ਬਨੀਤ ਕਹਤੇ ਫੁਰੀਦ ਜੁਕਿਆ ਸਭ ਬਸਤੇ ਆ ਜੈਸੇ ਤੇ ਆ ਗਿਆ ਸੀ ਉਹ ਲੋਕ ਇਹ ਜਿਹੜੇ ਹੌਣ ਦੁਆਰੇ ਦੇ ਇਹਨਾਂ ਦੇ ਨਾਲ ਜੋ ਸਰਵਨ ਸਰਵਨ ਲਾਹੋ ਤਾਂ ਜੋ ਇਹ ਅੰਦਰ ਗਿਆਨ ਦਿੰਦੇ ਨੇ ਅੰਦਰ ਭੇਜਦੇ ਨੇ ਮੈਸੇਜ ਸਰਵਨ ਸਰਵ ਕਰਾਂ ਆ ਸਰਵਨ ਜੋ ਹੈ ਅੰਦਰ ਨੂੰ ਜਾਂਦੀ ਹੈ ਚੀਜ਼ ਵਾਰੋ ਸਰਵਨ ਦਾ ਖਾਂਦੋ ਦੇਖ ਲੈ ਕੇ ਜਾਂਦੇ ਆ ਕੰਨਾਂ 'ਤੇ ਸੁਣ ਕੇ ਅੰਦਰ ਨੂੰ ਲੈ ਕੇ ਜਾਂਦੇ ਆ ਨੱਕ 'ਤੇ ਸੁੰਘ ਕੇ ਅੰਦਰ ਨੂੰ ਲੈ ਕੇ ਜਾਂਦੇ ਆ ਜੀਭ 'ਤੇ ਖਾ ਕੇ ਉਹਦਾ ਟੇਸ ਖੱਟਾ ਮਿੱਠਾ ਅੰਦਰ ਨੂੰ ਲੈ ਕੇ ਜਾਂਦੇ ਆ ਚਮੜੀ 'ਤੇ ਠੰਡਾ ਤੱਤਾ ਅਬ ਜ਼ਰੂਰ ਆ ਕੇ ਜਾਂਦੇ ਆ ਐਸੇ ਇਸ ਸਰਬਾਂ ਦਾ ਹੁੰਦਾ ਗੁਰਜੀਤ ਸੋ ਖਾ ਗਿਆ ਲੜਕਦਾ ਰਿਹਾ ਗੱਲ ਵੀ ਠੀਕ ਸੀ ਜਮਾਇਆ ਕੱਲ ਆ ਗਿਆ ਹਾਂ ਕੱਲੇ ਕੱਲੇ ਨਾਲ ਸਰਬਾਂ ਆਇਆ ਹੋਇਆ ਦੂਜਿਆਂ ਨਾਲ ਨਹੀਂ ਸਮਝ ਆਇਆ ਹਾਂ ਉਹ ਨੇ ਜਿਹੜਾ ਸਰਬਾਂ ਉਹ ਬਾਹਰ ਨੂੰ ਹੁੰਦਾ ਸਰਬਾਂ ਇਹਨਾਂ ਤੇ ਗੱਲ ਜੇਲਾ ਜਾਂਦੂ ਆਹ ਨੂੰ ਹੁੰਦਾ ਉਹ ਨਾਮ ਨਾਲ ਪਵਿੱਤਰ ਹੋ ਜਾਂਦਾ ਕਿਉਂਕਿ ਉਹ ਪਵਿੱਤਰ ਬਈ ਨਾਮ ਤੋਂ ਇੱਕ ਮੈਂ ਉਸ ਨੂੰ ਮਲਬੂਤਰ ਕਰਾਂ ਤਾਂ ਪਵਿੱਤਰ ਹੋ ਜਾਂਦਾ ਛੇਰੋ ਤੇ ਅੜ ਗਿਆ ਵੀ ਦੋ ਜਲੇ ਦਵਾਰ ਤੇ ਪੜਾ ਦੀ ਗੱਲ ਨਹੀਂ ਆਈ ਸਤਾਤੀ ਦਾ ਆ ਗਈ ਉਗਲਿਆਂ ਦੀ ਦੋ ਥੱਲੇ ਮਲਬੂਤਰ ਵਾਲਿਆਂ ਦੀ ਨਹੀਂ ਆਈ ਮਗਾਉਣਾ ਦੀ ਜਾਈ ਗਈ ਤਾਂ ਤਾਂ ਜਾ ਫੇਦਾ ਕੀਤਾ ਕੀ ਵਰ ਕੀਤਾ ਉਹ ਫਿਰ ਤਤੇ ਜਨ ਪੇਟ ਸਾਜਿਆ ਉਹ ਫਿਰ ਕੀ ਆ ਉਹ ਕੀ ਆ ਰक्त ਬਿੰਦ ਦਾ ਘਾਰਾ ਜਦ ਗਿਆ ਉਹ ਕੀ ਆ ਇਹ ਸਭ ਕੁਝ ਹੈ ਕਿ ਅਫੇਰ ਉਹ ਤੇ ਆਪਾਨ ਵాయు ਕਿਹਾ ਹੈ ਜਿਹੜੀ ਹਵਾ ਸਾਦੀ ਹੈ ਉਹ ਆਪਾਨ ਵాయు ਬਣਦੀ ਜੋ ਗੇ ਨੂੰ ਰੋਕ ਕੇ ਦਿਮਾਗ ਨੂੰ ਚੜਾਉਂਦਾ ਜਿਵੇਂ ਆਪਣੇ ਗੈਸ ਚੜਦੀ ਹੈ ਯੋਗੀ ਖਾਲੀ ਰੱਖਦਾ ਕੋਈ ਇਪੀਸ਼ਨ ਫੜਦੀ ਹੈ ਜਿਹੜੀ ਇਥੇ ਆ ਬੁੱਢੇ ਜਿਹੜਾ ਲਖਾ ਪੀਦਾ ਸਵਾਗਤ ਨੂੰ ਤਾਂ ਗੈਸੇ ਚੜਦੀ ਹੈ ਹਾਂ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਬ ਨੂੰ ਵਿਖਾਈ ਕਿਹਦੀ ਬਾਣੀ ਬਣਾ ਇਹ ਨਿਰਮਲ ਬਾਣੀ ਕਨਹਾ ਸੁਨੜੀਆ ਉਪਨੀਤ ਹੈ ਬਾਣੀ ਕਿ ਨਿਰਮਲ ਇਹ ਧਰਬਾਲਾ ਕਿਹ ਨੂੰ ਨਿਰਮਲ ਬਾਣੀ ਪੂਰ ਪ੍ਰਭੂ ਨੂੰ ਕਹ ਅਕਤੂ ਨੂੰ ਕਹ ਕੋ ਸਰੀਰ ਤੇ ਰਹਿੰਦਾ ਹੋਇਆ ਵੀ ਸਰੀਰ ਦੇ ਨਾਲ ਨਹੀਂ ਜੁੜਿਆ ਹੋਇਆ ਇਸ ਕਰਕੇ ਤੇਰੀ ਬਾਣੀ ਕਿਹ ਹੈ ਤੂੰ ਕਾਹਨ ਬੁਲਾਈਆ ਉਹਨੇ ਭੋਲਈਆ ਅਨੁਭਵ ਤੇਰੀ ਹੋਊਗਾ ਲੋਵੇ ਬਾਣੀ ਮਹਾਪੁਰਖ ਤੇਰੀ ਹੋਊਗਾ ਉਰਤੀਆ ਹੋਊਗਾ ਨਹੀਂ ਤਾਂ ਨਾਨਕ ਵੀ ਆ ਜਾਂਦੀ ਬਾਣੀ ਫਿਰ ਇਸ ਕਰਕੇ ਤੇਰੀ ਬਾਣੀ ਆਉਂਦੀ ਬੋਲਦੀ ਦਾ ਬੁੱਧੀਆ ਨੂੰ ਨਰਮਲ ਨਰਮਲ ਨਰਮਲ ਤੇਰੀ ਬਾਣੀ ਤੇਰੀ ਬਾਣੀ ਕਟ ਕਟ ਸੁਣੀ ਸਰਬਣੀ ਬਖਾਨੀ ਸਰਬਣ ਸੁਣੀ ਸਾਰੇ ਹਿਰਦਿਆਂ ਸੁਣੀ ਸਾਰਿਆਂ ਨੇ ਅੰਦਰ ਸਾਰੇ ਸੁਣਦੇ ਨੇ ਏ ਸੁਣੇ ਦਾ ਘਟ ਕੇ ਜਾਊਗੀ ਕੰਨਾ ਤੇ ਜਾਊਗੀ ਸੁਣੀ ਘਟ ਜਾਂਦੀ ਹੈ ਉਹ ਸੁਣੀ ਕਿੱਥੇ ਗਈ ਜੋ ਕੰਨਾ ਬੋਲੀ ਸੁਣ ਉਹ ਅਰੇ ਚ ਸੁਣ ਕੇ ਬਖਾਨੀ ਫਿਰ ਕੋਈ ਤੱਕ ਸੁਣ ਕੇ ਇਹ ਬਖਾਨੀਆਂ ਪਹਿਲਾਂ ਪੁਚਾਰੀ ਆ ਫਿਰ ਬੁਥਿਆਂਦੀ ਹੈ ਸਭ ਨੇ ਕੀਤੀ ਫਿਰ ਬੁਥੀ ਸੁਣੀ ਹੋਵੇ ਬੁਥੀ ਉਹ ਵੀ ਨੇ ਨਹੀਂ ਕੀਤਾ ਇਹ ਵੀ ਤਾਂ ਸੁਣੀ ਹੋ ਆਪਾਂ ਲੋਕ ਬਖਿਆ ਨਹੀਂ ਹੋ ਸਕਦਾ ਭਾਸ਼ਾ ਦਾ ਗਿਆਨ ਨਹੀਂ ਹੋ ਸਕਦਾ ਸਭ ਨੂੰ ਭਾਸ਼ਾ ਦਾ ਗਿਆਨ ਮੂਲੀ ਕਰ ਚੱਲਣਾ ਉਹ ਫਿਰ ਪੈਰਾ ਨਾਲ ਫਰਕ ਪਾ ਕੇ ਚੱਲਣਾ ਬੰਦਲੇ ਜਿਹੜੇ ਬਾਥੀ ਜਿਹੜੇ ਲਫਜ਼ ਨੇ ਕਸਾ ਪੈਰਾ ਦੇ ਉਹਨਾਂ ਦਾ ਅੱਲਾਹ ਤਾਲਾ ਦੀ ਜਿਹੜੀ ਲੈਂਗੁਏਜ ਹੈ ਉਹਦਾ ਫਰਕ ਹੈ ਜਿਹੜਾ ਗੁਰਮੁਖੀ ਭਾਸ਼ਾ ਦਾ ਫਰਕ ਉਹ ਸੁਣੇ ਕੇ ਹੀ ਪਤਾ ਲੱਗਦਾ ਹੈ ਗਣ ਸਰਪੰ ਬਖਿਆਣੀ ਸੁਵਿੱਤ ਨਾਮ ਜਿਹੜਾ ਬਖਾਨ ਕੀਤਾ ਹੈ ਫਿਰ ਵੀ ਸਰਪੰ ਕੀਤੀ ਹੋਈ ਹੈ ਦੂਜੇ ਪਾਠਕ ਦੀ ਗੱਲ ਉੱਥੇ ਕੀਤੀ ਹੋਈ ਹੈ ਉਸੇ ਗੱਲ ਨੂੰ ਵਾਹ ਬਧਾਇਆ ਹੋਇਆ जो जो ਬੁੱਧੇ ਕਬੀਰ ਦੇ ਚੱਕੇ ਹੋਏ ਨੇ ਕੋਟ ਪਾਪ ਦਾ ਵੀ ਚੱਕਿਆ ਹੋਇਆ ਹੈ ਦੇਵਤਾਂ ਦਾ ਵੀ ਚੱਕਿਆ ਹੋਇਆ ਹੈ ਸਾਰੇ ਮੁੱਦੇ ਚੱਕੇ ਕੁਝ ਬੁੱਧੇ ਨਹੀਂ ਵੀ ਚੱਕੇ ਗੁਰਾਂ ਦਾ ਨਵੇਂ ਚੱਕੇ ਤੋਂ ਮੁੱਦਿਆਂ ਤੋਂ ਵੀ ਜਿਹੜਾ ਖਲਾਸਾ ਜ਼ਿਆਦਾ ਕੀਤਾ ਬਗਵਾ ਖਲਾਸਾ ਜ਼ਿਆਦਾ ਜੀ ਭਾਈ ਜੀ ਜੇ ਆਪਾਂ ਕਹੀਏ ਸਾਜੀ ਨਿਰਮਲ ਨਿਰਮਲ ਕਹਾਂ ਕਹਾਂ ਕੀਤਾ ਹੋਰ ਖੋੜਾ ਸਾ ਕੀਤਾ ਹਾਂ ਪਵਿੱਤਰ ਪਵਿੱਤਰ ਪਵਿੱਤਰੁ ਕਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਪਵਿੱਤਰ ਪਵਿੱਤਰ ਪਵਿੱਤਰੁ ਕਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਇਹ ਤਾਂ ਜਿਹੜੀ ਬੋਲੀ ਹੋਈ ਹੈ ਪਵਿੱਤਰ ਪਵਿੱਤਰ ਪਵਿੱਤਰ ਬਹੁਤ ਪਵਿੱਤਰ ਪਵਿੱਤਰ ਗਹਨੂ ਰਹੁ ਉਹ तो ਪਹਿਲਾਂ ਜਿਹੜੀਆਂ ਬਾਣੀਆਂ ਰਹੀ ਸੀ ਉਹ ਵੀ ਪਵਿੱਤਰ ਸੀ ਜੋ ਕਬੀਰ ਨਾਲ ਬੜੀ ਆ ਰੰਗ ਤੋਂ ਵੀ ਪਵਿੱਤਰ ਆਪੋ ਬੈਠ ਤਾਂ ਮੈਂ ਹੀ ਦੀ ਉਹ ਪਵਿੱਤਰ ਐਸੀ ਭਾਵੇਂ ਉਹ ਭਾਸ਼ਾ ਦਾ ਫਰਕ ਸੀ ਭਾਸ਼ਾ ਰੂਹੀ ਕਾੜ ਲਈ ਚੀਜ਼ ਫਿਰ ਇਹ ਵੀ ਪਵਿੱਤਰ ਹੈ ਪਾਇਆ ਥੋੜੀ ਪੂਰੀ ਪਾਸ਼ਾ ਦਾ ਫਰਕ ਪੈਣੇ ਇਹ ਪੀਛੜੇ ਇਹ ਲਫ਼ਜ਼ ਕਬੀਰ ਨੇ ਨਾਮਦੇਵ ਨੇ ਬਸਿਆ ਗੁਰੂ ਕਰਨਾ ਨਹੀਂ ਵਰਤਿਆ ਬਹੁਤ سارے ਲਫ਼ਜ਼ ਨੇ ਜਿਹੜੇ ਕਬੀਰ ਨੇ ਵਰਤਿਆ ਨਾ ਗੁਰੂ ਕਰਨਾ ਨਹੀਂ ਵਰਤਿਆ ਇੱਥੇ ਲੋੜ ਨਹੀਂ ਸੀ ਪਹਿਲਾਂ ਉਹਦੇ ਵਿੱਚ ਨਾਮਦੇਵ ਨੇ ਜਦੋਂ ਉਹਦਾ ਛਪਰੀ ਦਾ ਲਫ਼ਜ਼ ਵਰਤੇ ਆ ਕਬੀਰ ਜੀ ਨੇ ਬੋਲਿਆ ਉਹ ਵੀ ਛਾਂ ਤਾਂ ਪੇ ਸਾਥ ਸਿਭਾਈ ਕਹਿਣਾ ਇਹ ਵੀ ਕਹਿੰਦਾ ਤਿਸ਼ਨਾ ਛਾਂ ਪਰ ਇਹ ਧਰ ਉਪਰ ਤੋਰ ਮਤ ਪੜਦਾ ਗੱਲ ਕਰਦੇ ਨੇ ਪਰ ਗੁਰੂ ਘਰ ਨੇ ਇਹ ਇਹ ਮੋਦਰੀ ਜਗਿਆ ਹੋਗਾ ਨਦੀ ਰੋ ਦੀ ਕਾਫੀ ਹਉ ਤੋਈ ਹੋ ਚੁੱਕਿਆ ਹੈ विनोय भाई गुरुला बोले एयरपोर्ट पे रिपोर्ट ठाणे विचारले साहब तो आज दिवाणी हा पर दशोपाषने छत ਕੀਤਾ जाय फसे जाया हो चैरे जरा मुद्दे जांबरे तुम पर बाकी इनकी पडले आ मंदिर आरंभ वे दशोपाषने भरून निघून है हे हा भाई गुरुला गुरु गुरु दी उस ਸ਼ਬਦ ਗੁਰੂ ਦੀ ਆ ਪਰਮੇਸ਼ਰ ਦੀ ਵਡਿਆਈ ਜਿਹੜੀ ਹੈ ਉਹ ਵੀ ਗੁਰਬਾਣੀ ਹੈ ਉਹਦੀ ਪਰਿਆਈਆ ਜੋ ਗੁਰਬਾਣੀਆਂ ਉਹ ਵੀ ਜਿਹੜੇ ਗੁਰਬਾਣੀਆਂ ਬਾਰੇ ਦੇ ਵਿੱਚ ਇਹ ਕਿਹਾ ਉਹਨੂੰ ਜਿਹੜੂ ਵੀ ਨਹੀਂ ਆਣਾ ਕੋਈ ਬਾਹਰੋਂ ਪ੍ਰਵੰਤ ਹੈ ਆ ਗੁਰਮੁਖਰੇ ਜਿਹੜਾ ਹੈਗਾ ਗੁਰਬਾਣੀ ਹੈ ਇਹ ਵੀ ਗੁਰੂ ਦੀ ਬਾਹਰ ਹੈ ਗੁਰੂ ਦੀ ਵਡਿਆਈ ਹੋ ਜਾਏ ਹੋਰ ਕੀ ਹੈ ਉਹਨਾਂ ਨੇ ਉਹ ਬਣਾ ਲਿਆ ਨਾਮ ਦਾ ਕੇਹ ਜੀ ਕਿਸ ਨੇ ਦੂ ਗੁਰਬਾਨੀਆਂ ਹਲਾ ਸਮਾਇਆ ਤਾਂ ਹੈ ਪਰ ਗੁਰਬਾਨੇ ਨਾਮ ਨਹੀਂ ਹੈ ਗੁਰਬਾਨੀ ਦੁਦ ਹੈ ਕਿ ਕਰਦੇ ਬਾਕੀ ਉਹਨਾਂ ਦੇ ਜਿਹੜਾ ਜਨਮ ਪਹਾੜਾਂ ਤੋਂ ਲਿਆ ਆਪਣੀ ਬਣੀ ਸੀ ਫਤਿਹ ਜੀ ਆ ਗਿਆ ਉਹਦੇ ਜਿਹੜਾ ਅਰੰਭ ਅਰੰਭ ਪ੍ਰਸਾਦ ਜੀ ਆਇਆ ਇੱਕ ਗੁਰਬਾਈ ਜੀ ਦੀ ਬਣ ਨਹੀਂ ਉਹ ਗੁਰੂ ਕਿਉਂ ਦੇ ਆਲਮ ਸਵਾਲ ਹੈ ਨਹੀਂ ਹੜਿਆ ਪੜਨਦਾ ਗੁਰੂ ਕੋ ਹਾਂ ਤੇ ਪਤਾ ਸੀ ਵੀ ਗੁਰੂ ਜਿਹੜਾ ਹੈ ਇਹਨਾਂ ਦੇ ਗੱਲ ਪਾ ਰਹੇ ਨੇ ਗੁਰੂ ਨੂੰ ਜਾਣਨ ਨਾਲ ਉਹ ਕਹਿੰਦੇ ਖਾਲਸਾ ਉਹਦਾ ਤਾਂ ਫਤਿਹ ਹੋਦੀ ਹੈ ਇੱਕ ਤਾਂ ਹੁਣ ਜਿਹੜੇ 10 ਪਾਸ਼ਾ ਆਪ ਜੇ ਉਹ ਸਾ ਪਾਜਾ ਖਾਲਸਾ ਹੈ ਮਦਲੇ ਆ ਪਹੁੰਚ ਲਈਏ ਕੋਈ ਖਾਲਸਾ ਸਜਿਆ ਫਿਰ ਉਹ ਵੀ ਵਾਇਗਰ ਹੁੰਦਾ ਹੀ ਹੈ ਖਾਲਸਾ ਵਾਇਗਰ ਵੱਡਾ ਹੋਵੇ ਉਸ ਵੱਡਾ ਕੋਈ ਜੇ ਭਾਵੇਂ ਇਹ ਬੁਲਾਉਂਦੇ ਰਹਿ ਤਾਂ ਵਾਇਗਰ ਵੱਡਾ ਰੋ ਇਹਨਾਂ ਨੇ ਵਾਇਗਰ ਛੋਟਾ ਕਰਕੇ ਆਪ ਵੱਡਾ ਕਰ ਲੈਣਾ ਹੁਣ ਕੀ ਕੀਤਾ ਉਹ ਵਾਇਗਰ ਨੂੰ ਗੁਰੂ ਫੜ ਲਿਆ ਪੁਰੂ ਅਮਰਦਾਸ ਦੇ ਨਾਮ ਅਰਮਦਾਸ ਦੇ ਨਾਮ ਦੀ ਅਰਦਾਸ ਸੁਨੇ ਬਹਿਲੂ ਦੇ ਦੱਸਦੀ ਅਰਦਾਸ ਚ ਨਾਨਕ ਦਾ ਨਾਮ ਆਊਗਾ ਜਿੱਥੇ ਜਿੱਥੇ ਵੀ ਜੀ ਦੇ ਕੋਲ ਦਾ ਨਾਮ ਆਊਗਾ ਕਿਤੇ ਕਿਸੇ ਦਾ ਆਊਗਾ ਕਿਤੇ ਕਿਸੇ ਦਾ ਕਿਤੇ ਦੱਸ ਪਾਸ਼ਾ ਦਾ ਨਾਮ ਆਊਗਾ ਪਰ ਪਰਮੈਸ਼ਰ ਕੋਲ ਲਗੇ ਪਰਮੈਸ਼ਰ ਦੱਸਦਾ ਵਾ ਇੱਕ ਦੂਜਾ ਜੇ ਜੇ ਪਰਮੈਸ਼ਰ ਨੂੰ ਭੁੱਲ ਗਏ ਪਰਮੈਸ਼ਰ ਤੇ ਭੁੱਲਿਆ ਤੇ ਆਪਣੇ ਸਭੇ ਰੋਗ ਸਾਰੇ ਰੋਗ ਆਵੜੇ ਲੱਗ ਲੋ ਡਾਕਟਰ ਸਾਰੇ ਰੋਗ ਆ ਵੀ ਬੜੇ ਪਰ ਇਹ ਗੱਲ ਆਪਣੀ ਜਗ੍ਹਾ ਪੰਕਤੀ ਸਾਬਤ ਕਰਦੀ ਹੈ ਕੋਈ ਪਰਮੈਸ਼ਰ ਨੂੰ ਭੁੱਲੇ ਹੋਇਆ ਤੁਸੀਂ ਰੋਗ ਆਵੜੇ ਬਚਣਾ ਇਸੇ ਦਾ ਵੀ ਰੋਗ ਨੂੰ ਕਰਦੀ ਹੈ ਰੋਗੀ ਜੇ ਰੋਗੀ ਉਹਨੂੰ ਦਾ ਪਤਾ ਵੀ ਲੱਗ ਜਵੇ ਫਿਰ ਵੀ ਉਹਦਾ ਇਲਾਜ ਨਾ ਕਰੇ ਫਿਰ ਇਹ ਸਭ ਤੋਂ ਰੋਗੀ ਦਾ ਕਾਲ ਹੈ ਬਹੁਤ ਆਜੀ ਉਹਦੇ ਫਿਰ ਕੋਈ ਪਤਾ ਨਹੀਂ ਰੋਗ ਹੈ ਇਲਾਜ ਨਹੀਂ ਕਰਦਾ ਫਿਰ ਤਾਂ ਮਨ ਲੈ ਅਭੀ ਮੌਤ ਭਈਆ ਅਜੇ ਮੈਨੂੰ ਲੋਈ ਕਰਦਾ ਮੌਤ ਹੈ ਕਾਹ ਕਹੇ ਜਬਰੂਕੀ ਕੋ ਕਾਲ ਗਰਸਾ ਤਰਾਂ ਉਸकी ਬੁੱਧ ਬਣਸਾ ਚੇਰੋ ਗੀ ਨੂੰ ਕਾਲ ਗਰਸਲਵੇ ਵੀ ਹੁਣ ਕਾਲ ਛੱਡਣਾ ਨੇ ਤਨੂ ਦੇਣਾ ਰੋਗ ਕਾਲ ਰੂਪ ਬਣ ਕੇ ਜ ਆਇਆ ਹੋਵੇ ਜਿਵੇਂ ਇਹਨਾਂ ਦੇ ਆਇਆ ਹੋਇਆ ਹੁਣ ਅਸਲ ਚ ਸਿੱਖ ਤਾਂ ਥਈ ਨਹੀਂ ਥੇ ਤੇ ਮਿਲਈ ਸਿੱਖਾਂ ਨੇ ਤਾਂ ਆਇਆ ਇਹਦੀ ਘਰ ਬੜੇ ਨਹੀਂ ਸਕਦਾ ਕੱਲ ਜੋ ਬੜੂ ਇਹਨਾਂ ਦੇ ਸਕਦਾ ਕਰੇ ਨੰਬਰ ਜੁਗਰ ਉਹਦਾ ਜਨ ਵੜਦਾ ਇੱਕ ਘੜੀ ਨਾ ਮਿਲਤੇ ਤਾਂ ਕਰ ਜੂਗਾ ਉਹ ਟਾਲ ਵੜ ਗਿਆ ਕੇ ਪਰ ਮੈਂ ਸਭ ਤੇ ਭੋਲਿਆ ਕਿ ਆਪਣ ਹੋਗੇ ਨਹੀਂ ਕਰਵਾਣੀ ਜੂ ਹੈ ਭਰਾ ਵਿੱਚ ਵੀ ਆਏ ਸਾਰੇ ਮੇਰੇ ਵਿੱਚ ਇਹਨਾਂ ਜਾਣਗੇ ਹੋਰ ਦਾ ਬਾਤ ਬੋਲਦੇ ਆ ਰੋਜ਼ ਹੋਰ ਕਿਹਦੇ ਵਾਸਤੇ ਹਾਂ ਵਾਸਤੇ ਬੋਲਦੇ ਆ ਮੁਨਾਵਾਸੇ ਕਹਿ ਰਹੇ ਹਜੜੇ ਰਹੇ ਆਪਣੇ ਮਗਰ ਲਾਏ ਨੇ ਜਿਹੜੇ ਇਹਨਾਂ ਨੇ ਗਲਤ ਫਹਿਮੀ ਨਾਲ ਆਊ ਡਾਇਵਰਟ ਹੋ ਵੀ ਰਹੇ ਨੇ ਹੋਣਾ ਨੇ ਆ ਵੀ ਜਾਣਾ ਸਾਰਿਆਂ ਨੇ ਆ ਜਾਣਾ ਸਾਰਿਆਂ ਗੁਰੂ ਵਾਲੇ ਨੇ ਜਿਹੜੇ ਗੁਰੂ ਦੇ ਨਾਲ ਖੜੇ ਨੇ ਖੜੇ ਹੀ ਗੁਰੂ ਨਾਲ ਹੈ ਇਹਨਾਂ ਨਾਲ ਕੋਈ ਨਹੀਂ ਖੜਾ ਜਿਉਂ ਨੇ ਪਤਾ ਲੱਗੂ ਆ ਪਵਿੱਤਰ ਪਵਿੱਤਰ ਪਵਿੱਤਰ ਕਨੀਦ ਨਾਮ ਜਪੇ ਨਾਨਕ ਮਨ ਪ੍ਰੀਤ ਪਵਿੱਤਰ ਪਵਿੱਤਰ ਪਵਿੱਤਰ ਫੁਨੀਤ ਇੱਥੇ ਤਾਂ ਪਵਿੱਤਰ ਹੈ ਬਾਣੀਆਂ ਇਹ ਸਾਰੀ ਪਵਿੱਤਰ ਕਰੂੰਗੀ ਹੋਰ ਪਵਿੱਤਰ ਕਰੂੰਗੀ ਇਸਦੇ ਨੂੰ ਹੋਰ ਪਵਿੱਤਰ ਕਰੂੰਗੀ ਤਉ ਤਵੋਂ ਦੇ ਰਜੋ ਚ ਲੈ ਕੇ ਆਉਂਗੀ ਰਜੋ ਦੇ ਸਤੋ ਵਿੱਚ ਲੈ ਕੇ ਆਉਂਗੀ ਸਤੋ ਤੇ ਫੁਨੀਤ ਵਿੱਚ ਲੈ ਕੇ ਜਾਉਂਗੀ ਜਦੋਂ ਤਬਲੀਲੀ ਆਉਣ ਚੌਥੀ ਤ੍ਰਿਯਾ ਚੌਥਾ ਪਦ ਜੀ ਲੋਤੀ ਤ੍ਰਿਯਾ ਤ੍ਰਿਯਾ ਤ੍ਰਿਯਾ ਪਹਿਲਾ ਨੇ ਵੀ ਤਾਂ ਸਾਰੇ ਨੇ ਸਭ ਸਾਰੇ ਮਾਇਆ ਦੀ ਭੁੱਖ ਹੈ ਸਭ ਮਾਇਆ ਦੀ ਤਮਾਤ ਰਜੋਜਾ ਜੂ ਕੋ ਰਜੋਜਾ ਜੂ ਆ ਪਈ ਠੀਕ ਹੈ ਜਨਮ ਦੇ ਤਾ ਉਹਨਾਂ ਖਾਲੇ ਰਜੋਣ ਉਹ ਤਾਂ ਮਾਇਆ ਮਗਰ ਨਹੀਂ ਪਈ ਜੋ ਠੀਕ ਹੈ ਪਰ ਉਹ ਗੁਰੂ ਵਾਲਾ ਜਿਹੜਾ ਕੰਮ ਉਧਰ ਧਿਆਨ ਹੈ ਹਾਂ ਜ਼ਰੂਰ ਇਹ ਜੋ ਉਹਦੇ ਥੋੜਾ ਬਹੁਤਾ ਜਨਨਾ ਖੁੰਨਾ ਬਣਾ ਬੋੜਾ ਦਾ ਖੁੰਨਾ ਵੀ ਕਰ ਦਿੰਦਾ ਜਿਵੇਂ ਲੋਕ ਕਰਦੇ ਹੀ ਨਹੀਂ ਆਮ ਲੋਕ ਨਾਲੋਂ ਜਿਹਾ ਜ਼ਿਆਦਾ ਰਜੋ ਤਮੋ ਰਜੋ ਸਭ ਤੋਂ ਨਹੀਂ ਨਹੀਂ ਰਜੋ ਕੋਣ ਜੇ ਪਹਿਲਾਂ ਕਈ ਜਿਹੜੀ ਬਾਲਬੁੱਧਾ ਰਜੋਗੁੜਚਾ ਫਾਇਦਾ ਬਾਲਬੁੱਧਾ ਰਜੋ ਉਹ ਖੁੱਖ ਲੱਗਦੀ ਹੈ ਸਮਾਂ ਜਾਗਦੀ ਹੈ ਸਮਾਂ ਤਾਂ ਜਾਗਦੀ ਜੇ ਤਮਾਂ ਹੀ ਜਾਗੀ ਬਾਲਬੁੱਧਾ ਜੋ ਫਿਰ ਤਾਂ ਗਿਆ ਜੈਸੀ ਉੱਗੀ ਪੇੜ ਤੇ ਫਿਰ ਪਚਾਲਿਓ ਖੱਬੇ ਜਾ ਸਕਦਾ ਆ ਸਜੇ ਜਾ ਸਕਦਾ ਸਜੇ ਜਾ ਲਾਗਾ ਸਤਿਨਾਕ ਲਖਨਾਂਕ ਲੇ ਤੁ ਗਿਆ ਫਿਰ ਲੱਗੀ ਹੋਈ ਜਾਣਾ ਇਹ ਨਿਊਟਰਲ ਗੇ ਰਹੇ ਨੇ ਤਪਰ ਉਹੀ ਰਹੂਗਾ ਅੱਜ ਕੀ ਇਹ ਵਸਾਵਾਂ ਲੱਗਾਂ ਘੁਰਤੇ ਦੁਆਪਰ ਕਾਲ ਹੈ ਨਾ ਤੇਰੇ ਜੇ ਮੈਂ ਕੁਛ ਪਹਿਲੇ ਹਜ਼ਰ ਤੇੜਾ ਦੁਤੀਆ ਹਰ ਦੋ ਸਮਾਨ ਆ ਕਾਲ ਹੁਣ ਤਾਂ ਕਾਲ ਹੈ ਸਾਡੇ ਕੋਲ ਫਿਰ ਐਸ ਵਕਤ ਕਿਹੜਾ ਯੁਗ ਚੱਲਦਾ ਉਹ ਗੱਲ ਅਲੱਗ ਹੈ ਐਸ ਵਕਤ ਕਿਹੜੀ ਵਸਤਾ ਚੱਲਦੀ ਉਹ ਗੱਲ ਅਲੱਗ ਹੈ ਪਹਿਲਾਂ ਕਿਹੜੀ ਪਹਿਲਾਂ ਤੇਰੇ ਤਾਸੀ ਤੇਰੇ ਤਨ ਹੈ ਦੀ ਸਾਡੇ ਕੋਲ ਪੋਜੀਸ਼ਨ ਜਦੋਂ ਬਿਮਾਰ ਹੈ ਉਦੋਂ ਉਹਦੀ ਹਾਲਤ ਕੀ ਹੈ ਜਿਹੜਾ ਬਿਮਾਰ ਦਾਖਲ ਹੋਇਆ ਕੇ ਲੇਜੋ ਕੋਣ ਆ ਬਿਮਾਰ ਨਹੀਂ ਹੁੰਦਾ ਇਹ ਨਾ ਇਹਦੀ ਹਾਲਤ ਬਿਗੜੀ ਹੋਈ ਹੈ ਸਮਾਉਣ ਵਾਲੀ ਦੀ ਹਾਲਤ ਬਿਗੜੀ ਹੋਈ ਹੈ ਉਹ ਨਾਮ ਦਾ ਵਿਰੋਧ ਕਰਦਾ ਖੁਦ ਨਾਵਾਂ ਨਾਲ ਵਿਰੋਧ ਹੈ ਲੇਜੋ ਕੋਣ ਆ ਵਿਰੋਧ ਵੀ ਕਰਦਾ ਹੁੰਦਾ ਉਹ ਭਗਤੀ ਕਰਦਾ ਆਇਆ ਹੁੰਦਾ ਹੈ ਕਰਮ ਚ ਉਹ ਲੈ ਲੈ ਨਹੀਂ ਰਹੀ ਹੁੰਦੀ ਕਰਦਾ ਸੀ ਪ੍ਰੋਧ ਤੇ ਇੱਥੇ ਆ ਕੇ ਕੰਨ ਲੱਗ ਗਿਆ ਕੇ ਹੋ ਗਿਆ ਸਮਝ ਆ ਗਈ ਉਹ ਸੌ ਗਈ ਦੂਈ ਸਤਵਗੋਣੀ ਅਗੇ ਸਤੀਸਪਤਰੀ ਦੀ ਜੋ ਸੋਬੀ ਉਹ ਸੁਤਿਓ ਯਾ ਯਾ ਲੀ ਹੈ ਤੇ ਦੁਰਮਤਵ ਵਾਲ ਨੂੰ ਤਾਂ ਭਜਦਾ ਹੈ ਮਾਇਆ ਵਾਲ ਨੂੰ ਤਾਂ ਭਜਦਾ ਮਾਨ ਮਾਨ ਉਹ ਹਾਜਰੇ ਪ੍ਰਧਾਨ ਹੈ ਜਨਾਂ ਜਤਮ ਨੂੰ ਕੋਣ ਜਿਹੜਿਆ ਉਸ ਤਮਸ ਗੁਰ ਸ਼ਕਤੀਆ ਉਪਰ ਦਾ ਉਹਦਾ ਉਹਦੀ ਪਹਿਰਾ ਚੱਲਦਾ ਹੈ वोदा बदरूगी आ कुर्बानी सतों को नाड़ी रजो बोलती लेओ कुर्बानी सतों ने ले ए, ए ले के आऊंगी रजोण सधा सतों को जीका सतों तो रजो जी लेके आऊं हां हैगा जो लेके وارما چا کے ڈویلپ लगूगी گی پھر ڈویلپ ہو लगूगी پھر سمجھاؤ گی چل ڈویلپ ہو پھر قربانی سنا لبلی تے تاں نہیں سمجھاؤ تے اگر وہ کی لب نہیں لگدی جی قربت ہے ہو قربانی سب چٹیا سے وہ سب بس تھج ਅਗਰ ਇਹ ਕੱਤੇ ਕਾ ਹੋਏ ਵਿਚਾਰੋ ਚਿਤਕਾਰਗਾ ਉਹ ਝੋਲਾ ਜਮਰੂ ਜਮਰੂ ਉਹ ਸੇ ਕਰਤੀ ਜਾਵੇ ਸਮਝ ਆਉਂਦੀ ਏ ਉਡੀ ਉੱਚੀ ਅਵਸਥਾ ਤੇ ਮਾਇਆ ਨਾਲ ਟੁੱਟ ਗਈ ਏ ਦੀ ਸਮਝ ਆਉਂਦੀ ਏ ਮਾਇਆ ਦਾ ਤੋੜ ਲਈ ਜੀਦਾ ਫਿਰ ਇਹ ਤੇ ਪਤਾ ਲੱਗਦਾ ਵੀ ਗੱਲ ਕੀ ਹੈ ਹਾਂਜੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਪੁਨੀਤ ਆ ਬਾਣੀ ਪਵਿੱਤਰ ਪਵਿੱਤਰ ਹੁੰਦੇ ਨੇ ਪੁਨੀਤ ਵਿੱਚ ਸਮਾ ਜਾਣਾ ਉਸ ਬਾਣੀ ਸ਼ਬਦ ਸਮਾਵਾ ਚਾਹਤੋ ਸੁਰਤ ਸ਼ਬਦ ਵਿੱਚ ਸਮਾਵੀ ਫਿਰ ਵੀ ਪੁਨੀਤ ਹੈ ਜਨਾਜਾ ਸਮੋਦਾ ਨਹੀਂ ਉਹਨਾ ਚ ਪਵਿੱਤਰ ਜਨਾਜ਼ਰ ਸਰੀਰ ਉਹਨਾਂ ਦਾ ਸਮਾਨ ਹੀ ਚੱਲਦਾ। ਉਹ ਦਿੱਤੋਂ ਤਾਂ ਕਰਦਾ ਜਿਹਦੇ ਜੀ ਹੋਗਤਾਂ। ਤੇ ਸਮੋਦਾ ਕੋਈ ਚਰਵਾਸਤੇ ਤਾਂ ਵੀ ਪਵਿੱਤਰਿਆ ਮਾਇਆ ਦੇ ਵਿੱਚ ਰਹੂਗਾ ਪਵਿੱਤਰੇ। ਦੇਖਦਾ ਅੱਖਾਂ ਤਾਂ ਹੀ ਆ। ਗੱਲਬਾਤ ਨਹੀਂ ਕਰਦਾ। ਇਸ ਉਪਦੇਸ਼ ਨਹੀਂ ਕਰਦਾ। ਗੁਰਬਾਣੀ ਦੀ ਭਾਸ਼ਾ ਦੀ ਬੋਲਦਾ ਹੈ। ਪਵਿੱਤਰੇ ਭਾਸ਼ਾ ਉਹ ਜਿਦਾ ਜੁਨੀਆਂ ਨੂੰ ਸਮਝਾਊਗਾ ਮਾਇਆ ਦੀ ਗੱਲ ਕਰੂਗਾ ਮਾਇਆ ਦੇ ਮਤਲਬ ਹੈ ਇੱਕ ਐਗਜ਼ਾਮਪਲ ਆਉਂਦਾ ਹੈ ਪਵਿੱਤਰ ਰੂਪ ਨਹੀਂ ਤੇ ਨਜ਼ਰ। ਜੱਪ ਵੀ ਜੱਪ ਨਹੀਂ ਦੋਈ ਵਰ ਪਾਜਾ ਹੋ ਰਿਹਾ। ਉਹ ਬਿਨਾਂ ਕਰਾਂ ਦਾ ਸੋਣਾ ਨਹੀਂ ਪਾਜਾ। ਉਹ ਬੋਲੀ ਹੋਵੇ। ਉਹ ਇਹ ਬੋਲੀ ਉਹ ਬੋਲੀ ਉਹ ਆ ਲੋਕ ਮਰਵਾਣ ਕੋਲਦੇ ਨੇ ਆਪਾਂ ਚਾਹਨੇ ਸਾਡੇ ਜਿੱਤ ਜੋ ਉਹ ਜਿਹੜਾ ਪੁੱਠਾ ਸਦਾ ਜਿਹਾ ਹੁੰਦਾ ਨਾ ਆ ਬੈਠਾ ਹੀ ਇਛਾ ਰੱਖਦਾ ਵੀ ਇਹ ਢਾਲ ਬੈਠ ਉਹ ਬੋਲੀ ਉਹੀ ਹੈ ਬੈਠਾ ਹੀ ਆਪਣੀ ਸ਼ਕਤੀ ਜੀ ਲਾਈ ਜਾਂਦਾ ਨਾ ਘਰ ਕੋਈ ਨਹੀਂ ਸਕਦਾ ਹੱਥ ਨਹੀਂ ਲਾ ਸਕਦਾ ਉਹ ਹੀ ਬੋਲੀ ਹੈ ਬਸ ਉਹ ਤਾਂ ਉਹੀ ਬੋਲੀ ਆ ਉਹ ਤਾਕਤ ਹੈ ਉਹ ਤਾਂ ਉਹੀ ਗੱਲ ਆ ਹੋਦੀ ਹੈ ਨਾਮ ਜਪੇ ਨਾਲ ਚਾਹੀਦਾ ਨਾ ਉਹਦੀ ਇੱਛਾ ਹੀ ਹੈ ਨਾ। ਪੈਹੇ ਜੀ ਹੈ। ਹਾਂ। ਨਾਮ ਜਪੇ ਨਾਨਕ ਮਨਪ੍ਰੀਤ। ਨਾਮ ਜਪਾ ਪ੍ਰਭ ਦਾ ਬੁਦ। ਇਸ ਕਰਕੇ ਗੁਰਬਾਣੀ ਦੇ ਵਿੱਚੋਂ ਇਹ ਜਿਹੜਾ ਲੋਭ ਇਹਨੂੰ ਜਪਣਾ ਚਾਹੀਦਾ। ਪੰਤ ਪ੍ਰੀਤ ਰੱਖ ਕੇ ਪ੍ਰੀਤ ਕਾਦੀ ਰੱਖ ਕੇ ਵੀ ਸਾਡੇ ਇਹ ਜੋ ਕੁਝ ਕਿਹਾ ਸਾਡੇ ਹਿਤ ਬਾਸ ਹੈ ਕਿਹਾ ਹੋਵੇ ਗੁਰ ਬਾਣੀ ਦਾ ਰੂਪ ਹੈ ਜਿਹੜਾ ਗੁਰ ਬਾਣੀ ਦਾ ਭਲਾ ਭਲਾ ਭਲਾ ਤੇਰਾ ਰੂਪ ਇਹ ਭਲਾ ਕਰਨ ਵਾਲੀ ਹੀ ਅਦਾ ਸੂਰਜੋ ਸ਼ਬਦ ਦਾ ਰੂਪ ਹੈ ਉਹ ਭਲਾ ਕਰਨ ਵਾਲੀ ਆਤ ਸੁੰਦਰ ਆਪਾਰ ਹੋਣ ਆਤ ਸੁੱਧਰਾ ਰੂਪ ਹੈ ਜਰੂਰ ਪਰ ਉਹ ਕੀ ਆ ਤਸੁੱਧਰਾ ਬਾ ਉਹ ਦਰਸ਼ਨ ਤੋਂ ਹੀ ਪਤਾ ਲੱਗੂਗਾ ਇਹ ਤਾਂ ਸੁਣ ਲਿਆ ਉਹ ਐ ਦੀ ਬਤਾ ਲਖਣਾ ਕੀ ਹੈ ਅੱਜ ਸੁਦਰ ਵੀ ਕਹਤਾ ਆਵਾਰ ਰੂਪ ਵੀ ਕਹਤਾ ਜਿਹੜਾ ਦੇਖਦੇ ਹੀ ਪ੍ਰਮਾਨ ਹੈ ਪ੍ਰਮਾਨ ਕਰੂਗਾ ਦੇਖ ਕੇ ਦੇਖ ਕੇ ਜਿਹੜਾ ਹੁਣੇ ਦੇਖਦੇ ਹੀ ਪ੍ਰਮਾਨ ਸੁਣ ਲਿਆ ਅੱਜ ਤੇ ਦੇਖ ਲੂ ਪ੍ਰਮਾਨ ਕਰੂ ਵੀ ਹਾਂ ਇਹੇ ਜਾਈ ਜੈਸਾ ਸਤਕੁਲ ਸੁਣੀਦਾ ਮੈਂ ਸੁਣੀ ਮੈਂ ਜੀੜੂ ਜੈਸਾ ਸੁਣੀ ਮੈਂ ਜੀੜੂ ਤੇ ਸੁਣ ਲੂਗਾ ਫੇਰ ਪ੍ਰਮਾਨ ਕਰ ਦੂਗਾ ਹਰੇ ਦਾ ਸੁਣਿਆ ਸੁਣਿਆ ਹੈ